ਜੇ ਪ੍ਰਸਾਦ ਆਪੂਖਣ ਪਹਿਰੀਜੈ ਮਨ ਦੇਸ ਸਿਮਰਤ ਕਿਉਂ ਆਰਸ ਕੀਜੈ ਆ ਜਿਹੜੇ ਆਪੂਖਣ ਨੇ ਉਹ ਦੋੇ ਤਰ੍ਹਾਂ ਪਉਂਦਿਆਂ ਨੇ ਇਹਨਾਂ ਦੇ ਸਾਧੂ ਵੀ ਪਉਂਦੇ ਨੇ ਰਾਜੇ ਦਫਾਉਂਦੇ ਹੁੰਦੇ ਨੇ ਜਿਹਨੂੰ ਤਾਂ ਪਉਂਦਾ ਹੀ ਪਉਂਦਾ ਉਹ ਤਾਂ ਕਦ ਚਦ ਕੇ ਕੋਲ ਦਰਵਾਨੇ ਉਪਰ ਜਿਹੜਾ ਉਹ ਪਉਂਦੇ ਚਾਹੇ ਜੋਗੀ ਹੈ ਕਿਆ ਹੈ ਜਿੰਕਾ ਪੜਨਾ ਤਾਂ ਉਹਨਾਂ ਦਾ ਆਵਦਾ ਵੀ ਬਹੁਤਾ ਪੜਨਾ ਦੇਵ ਜੀ ਦੇ ਜਨਪਾਦ ਤੋਂ ਹੁੰਦਾ ਜੀ ਇਹ ਉਹ ਆਪੇ ਦੇ ਪਾਵੇ ਤਾਂ ਦੇਵ ਜੀ ਦੇ ਜਨ ਲੋਕ ਜਿਹੜਾ ਉਹਦੇ ਜੀ ਨੂੰ ਨੋਹਣਾ ਆਇ ਰਿਹਾ ਹੋ ਜਾਂਦੀ ਹੈ ਉਹ ਸਿਕਾਲਣਾ ਪੈਂਦਾ ਦੇਵ ਜੀ ਨਾਲ ਤਾਂ ਫੋਨਦਾਲ ਵੀ ਦੇਵ ਜੀ ਦੇ ਲੋਕ ਹੋ ਗਏ ਮੈਂ ਇਹ ਕਹਿ ਰਿਹਾ ਕੋੜਾ ਬਾਦਕਾ ਤੁਸੀਂ ਜੀ ਨੇ ਚੜਾਵਾ ਹੋਇਆ ਹੈਗਾ ਤਾਂ ਇਹ ਸਾਜੀ ਹੋਣਾ ਉਹਨਾਂ ਹੋਦੀ ਹੈ ਕੈਨੇਵੀਰਾ ਹੋ ਟੈਕਸ ਬੁੱਕਾ ਦੇ ਵਿੱਚ ਪੜਾਈ ਜਦੋਂ ਉਹ ਕਰਨੀ ਉਹਦੇ ਤੋਂ ਸੋਹਣੇ ਗਾ ਰਹੇ ਹਾਂ ਜੇ ਕੋਈ ਖਾਣਾ ਭੁੱਖੋਂ ਪੈ ਰਿਜੇ ਮੈਨੂੰ ਪ੍ਰਕਾਸ਼ ਦਾ ਭੁੱਖੋਂ ਪੈ ਰਿਜੇ ਜੀ ਕਿਰਪਾ ਨਾਲ ਜਿਹੜੇ ਕੈਨੇੜੀ ਆਪੋ ਗਣ ਕੈਨੇ ਸੋਹਣੇ ਦੇ ਹੀਰੇ ਦੁਆਰਾ ਤੋਂ ਕੋਈ ਆ ਰਿਹਾ ਜਿਹੜੇ ਹੋਣਗੇ ਬਿਸ਼ਰੂ ਦੇ ਨਾ ਰਾਜੇ ਵੀ ਕੋਲ ਨੇ। ਸਾਂਘਾਵਲ ਨੂੰ ਘੁਣ ਬਣਾਏ ਕਿਦਾਂ। ਬਣਾਏ ਤਾਂ ਅਸੀਂ ਹੀ। ਨਾ ਸੋਨਾ ਬਣਾਇਆ ਆਦਮੀ ਨੇ। ਨਾ ਹੀਰੇਦਾਰਾ ਤੋਂ ਬਣਾਇਆ ਨਾ ਕੋਈ ਪੈਸੇ। ਬਣਾਉਣਾ ਲੱਗ ਦਿੱੱਲ ਬਣਾਇਤੀ। ਜੇ ਤੁਸਾਲਾ ਧੂਖਣ ਪਹਿਰੀ ਜੀ। ਹਾਂ ਜੀ ਦੀ ਕਿਰਪਾ ਨਾਲ ਧੂਖਣ ਤੋਂ ਆ ਮੇਰੇ। ਇਹਨਾਂ ਨੂੰ। ਮਾਰਦੇ ਜਿਵੇਂ ਸਮਰਤ ਕਿਉਂ ਆਲਸ ਕੀ ਜੇ ਲੋੜ ਦੇ ਸਮਰਤ ਨੂੰ ਆਲਸ ਕਿਉਂ ਕਰਦਾ ਹਾਂ ਕਿਉਂ ਕਹੀਆ ਭੁੱਖ ਲੱਗਦੀ ਹੈ ਆਪ ਨੂੰ ਕੋਲ ਪੈਂਟਾ ਮੁਰਗੀ ਬਣਦੀ ਹੈ ਉਹਨੇ ਬਣਾਇਆ ਜੀ ਤਾਂ ਭੁੱਖ ਲੱਗਦਾ ਵਿੱਚੋਂ ਜ਼ਰੂਰ ਹੈ ਪਰ ਬਾਹਰ ਵੀ ਛੂਹ ਨਹੀਂ ਕਿਸੇ ਦੀ ਕਿਰਪਾ ਨੂੰ ਪਾ ਗੱਲੋ ਕਹੇ ਗਏ ਕੱਲ ਸੁਖੀ ਹੈ ਪਰ ਕਹੀ ਤੋਂ ਹੈ ਇਸ ਸੁਖੀ ਕੀ ਅਰਥ ਹੈ ਦਿਨ ਸੁਖੀ ਜੇ ਜਿਹੜਾ ਪੈਂਦਾ ਉਹ ਕਿਸੇ ਦੀ ਕਿਰਪਾ ਨਾਲ ਪੈਂਦਾ ਪੈਂਦ ਨਾਲ ਵਾਲਾ ਆਪ ਬਣੂਣ ਵਾਲਾ ਦੀ ਸਾਨੂੰ ਲਾ ਉਹ ਕਰਤਾ ਨਹੀਂ ਕਰਤਾ ਕੋਈ ਹੋਰ ਆਪੂ ਖੁਮਾ ਲਾ ਆਪੂ ਭੁਲਾਉਂਦਾ ਉਹਦਾ ਆਪਣਾ ਵੀ ਕਰਤਾ ਉਹੀ ਆ ਸ੍ਰੀ ਜੀ ਦਾ ਮਿੱਤ ਲਿਖਣਾ ਉਹ ਇੱਕ ਅਗਰੇ ਸੀ ਨਾ ਲਗਿਆ ਪਰ ਤੋਂ ਉੱਤੇ ਦੀ ਪਰ ਤੋਂ ਨਹੀਂ ਲੱਗਿਆ ਉਹ ਕਹਿੰਦਾ ਵੀ ਸਾਡੇ ਜਿਹੜਾ ਹੈਗਾ ਗॉड ਉਹਨੇ 7 ਦਿਨ ਨੂੰ ਅ ਅਟਾਉਂ ਬਣਾਈਆ ਦਿਨ ਨੱਚੇ ਆ ਸਿਸਟਮ ਆਇਆ ਸਤਿਮੇਦੁਰੂ ਰੈਸਕੀ ਦੀ ਹੈ ਨਾ ਨਾ ਮਤਲਬ ਵੀ ਸਿਸਟਮ ਪੈਣਾ ਪਈ ਹੋਸੀ ਅੱਛਾ ਕਿਉਂ ਨਾ ਪਹਿਲਾਂ ਬੈਨ ਕੰਦ ਹੋ ਕਹਿੰਦਾ ਥੋੜੋ ਤਾਂ ਹੀ ਪੈਣਾ ਹੈ ਜਿੰਨਾ ਬਣਿਓ ਜੀ ਜਿੱਦ ਕਿ ਅਕੈਡਮੀ ਸੀ 20 ਦਿਨ ਹੀ ਤਾਰੇ ਵੀ ਸੀ ਬਣਾਇਆ ਸੀ ਉਹ ਤਾਂ ਸੁੱਕੀ ਬਣਾਇਆ ਆਦਮੇ ਨਹੀਂ ਸੀ ਕਿ ਉਹ ਆਪੇ ਸੀ ਆਦਮੀ ਤਾਂ ਆਪੇ ਸੀ ਉਹਨੇ ਕੀ ਬਣਾਇਆ ਦੱਸ ਹਵਾ ਵੀ ਸੀ ਪਾਣੀ ਵੀ ਸੀ ਸਭ ਕੁਝ ਸੀ ਉਹਨੇ ਕੀ ਬਣਾਇਆ ਉਹ ਦੱਸ ਕੋਈ ਜੋ ਬਗੈ ਜਦ ਆਇਆ ਫੜੀਦਾ ਨਾ ਬੋਲਤੀ ਬੰਦ ਇੱਥੋਂ ਹੁੰਦੀ ਐ ਉਹਨੇ ਉੱਥੋਂ ਹੀ ਜਾ ਬੜਿਆ ਭਈ ਸਭ ਕੁਝ ਬਣਿਆ ਹੋਇਆ ਹੈਗਾ ਉਹਦੇ ਸੱਚੇ ਦਿੱਦ ਜੇ ਤਾਹੀਂ ਗਣਾ ਹੋਣ ਜੇ ਜਨਨ ਲਾਤ ਹੈ ਯਾਦੋ ਕੋਹ ਦੂਰ ਜੂਰ ਜੁ ਬਣਾਇਆ ਬਣਾਉ ਨੇ ਸਤਿਭਾਈ ਚੰਦਰਮਾ ਬਣਾਇਆ ਕਿਵੇਂ ਬਣਾਉ ਦੱਸ ਇਹ ਤਾਂ ਪੁੱਛਦਾ ਕਹਾਂ ਮਾਉ ਤੇ ਕਿ ਤੂੰ ਦੱਸ ਬਰੇਟੂ ਵੀ ਬਣਾਇਆ ਇਹ ਕੋਈ ਜੋ ਨਹੀਂ ਜੇ ਨਾ ਤੁਸੀਂ ਕਹਿੰਦਾ ਬਾਦ ਚੜਨਾ ਦੂਰ ਜੂ ਬਣਾਉਂਦਾ ਕਹਿੰਦਾ ਤਬਾ ਸਤਿਭਾਈ ਬਣਦੀ ਤਾਹਨ ਪਤਾ ਕੀ ਵੀ ਇਹ ਜੋ ਬਲਡੀ ਸੀ ਇਹ ਕੋ ਬੁਨਾ ਦੀ ਰਹਾ ਤਾਹੀ ਬੜੀ ਸੀ ਕਿਡਾ ਬੜਾ ਸੈਸ਼ਨ ਤੇ ਬਾਅਦ ਇਹ ਨਾਲ ਪੜਦੇ ਸੀ ਸੇਵੇਂ ਬਣ ਕੇ ਮੈਂ ਨਾਲ ਕਹਿੰਦਾ ਤੂੰ ਹੀ ਪਾਗਲ ਬਣੇ ਹੋ ਤਾਂ ਕੇ ਚਲਾ ਗਿਆ ਆਦਾ ਕਰ ਮਨ ਨੇ ਐ ਕਿ ਇੱਕ ਬੁਢੀ ਸੀ ਅਗਰੇ ਜਾਂਦੀ ਕਾਂ ਪੈਂਟਾ ਬਾਬਾ ਲਾਲਾ ਜੋਲੇ ਭਾਈ ਜੱਜ ਨੇ ਜਿਆਦਾ ਅਕਲ ਨਹੀਂ ਹੈ ਜੀ ਇਹਦਾ ਪੈਂਟਾ ਪਾਉਣ ਵਾਲਿਆਂ ਦੀ ਅਕਲ ਮਾਰੀ ਹੋਈ ਆ ਜਿਹੜੇ ਪੈਂਟਾ ਉਹਨਾਂ ਨੇ ਮਦਰ ਲਾ ਕੇ ਪਾਉਂਦੇ ਨੇ ਇਹ ਆ ਬੋਲੇ ਜੀ ਉਸ ਜਦ ਇਹ ਨਾ ਕੋਣ ਲੱਗਿਆ ਗੁਜੀਤ ਭਾਈਆਂ ਕੋਣ ਪੈਂਟ ਲਾ ਲੈਣਗੇ ਹੁਣ ਜੋਲੇ ਬਾਬਾ ਅਕਲ ਦਾ ਜੋਲੇ ਆਣ ਕੋਲੇ ਮਿਲ ਗਿਆ ਉਹ ਨਹੀਂ ਕਰਦਾ ਜਿੱਦੋਂ ਕੁੰਭਲੇ ਹਾਲਾਂਕਿ ਉਹ ਬੜਿਆ ਧੰਕਾ ਤਾਂ ਲੋਕ ਸੰਤ ਬਣ ਜਾਂਦੇ ਨੇ ਹਾਂ ਤਾਂ ਨਹੀਂ ਜੇ ਤੋਂ ਪੜ੍ਹ ਕੇ ਇਹਨੂੰ ਮਰਦਾ ਉਹ ਯਾਰ ਉਹ ਪੜਨਾ ਪਾਉਂਦਾ ਤਾਂ ਪ੍ਰਾਪਤੀ ਹੁੰਦੀ ਹਾਂਜੀ ਜੈ ਪ੍ਰਸਾਦ ਅਪੂਖਣ ਪਹਿਰੀਜੈ ਮਨ ਤੇ ਸਿਮਰਤ ਕੋ ਆਰਦ ਦਰੋਗੇ ਕੀ ਹੈ ਉਹ ਕੋਨੇ ਆ ਜੇ ਪ੍ਰਸਾਦ ਅਮੀ ਲੋਕ ਦੇ ਪੇਂ ਹਮਾਰੇ ਜੈ ਮਨ ਤੇ ਸਮਰਪਿਤ ਜੋ ਆਰਤੀ ਜੇ ਚਲੋ ਜੇ ਇਹ ਪ੍ਰਸਾਦ ਨਾਲ ਤੋਂ ਕਰਦਾ ਹੈ ਤੇ ਜਿਆਦਾ ਜਗਾ ਹੁੰਦਾ ਹੈ ਮਨ ਸਮਰਪਿਤ ਕਿਉਂ ਆਰਤੀ ਕਰਦਾ ਹੈ ਕਿਰਪਾ ਨਾਲ ਕਰਦਾ ਜਾਤੀ ਜਿਹਨੇ ਉਹ ਬਣ ਪਣਾਇਆ ਨੇ ਉਹਦਾ ਤੈਨੂੰ ਗਿਆਨ ਨਹੀਂ ਰਿਹਾ ਮਤਲਬ ਜੇ ਤੂੰ ਉਹਨਾਂ ਤੋਂ ਨੂੰ ਕਿਹਾ ਆਸ ਕਰਨਗੇ ਹੈ ਉਹ ਆ ਜਾਵੇ ਉਹਦਾ ਤੂੰ ਸਮਝਦਾ ਤੂੰ ਜਿਹੜਾ ਕਹਿੰਦਾ ਉਹਨੂੰ ਫਰਾਂ ਨੇ ਇਹ ਚੀਜ਼ ਦੇਤੀ ਉਹ ਦੇਤੀ ਛਿਪੀ ਨਾ ਤੇਹਲੀ ਤੋਂ ਕੀ ਦੀ ਉਹ ਹੀਰੇ ਦੀ ਥੀ ਪਹਿਲਾਂ ਤਾਂ ਛਿਧੀ ਹੈ ਛਿਪੀ ਨੇ ਦੇਤੀ ਇਹ ਹੀਰੇ ਬਣਾਏ ਉਹਦੀ ਗੱਲ ਕਰੋ ਆ ਮਾਰੀ ਚੱਕੇ ਉੱਤੇ ਪਿੱਛੇ ਮਾਰੀ ਚੱਕੇ ਓਏ ਮੇਰੇ ਕੋਲ ਕੋਈ ਪੈਸੇ ਨਹੀਂ ਮੈਂ ਦੇ ਸਕਿਆ ਕਿਸ ਨੂੰ ਮੇਰੇ ਕੋਲ ਕਿਥੋਂ ਆਏ ਸਵਾਲ ਕਰ ਲਿਆ ਮੇਰੇ ਕੋਲ ਕਿਥੋਂ ਆਏ ਉਹ ਜਿੱਦ ਤੱਕ ਪਿੱਛੋਂ ਆਉਂਦੇ ਹੋ ਦੇਖੋ ਇਹਨੇ ਬਣਾਏ ਨੇ ਕਰਤੇ ਤੱਕ ਲੈ ਗਏ ਗੱਲ ਨੂੰ ਚਿੱਤ ਦੀ ਗੱਲ ਨਾ ਕਰੋ ਵਿਚਾਲੇ ਉਹ ਗੱਲ ਸ਼ੁਰੂ ਕਰੋ ਵਿਚਾਲੇ ਆਪ ਪਿੱਛੇ ਵਾਲੇ ਨੂੰ ਨਾ ਤੁਸੀਂ ਕੋਣ ਕਹੋ ਉਦੋਂ ਤੇ ਚੇਤੀ ਕੋਈ ਹਰ ਮਾ ਉਹਦੇ ਤੇ ਚੇਤੀ ਕੋਈ ਹੈਗਾ ਐਂਟੀਟੇਜਰ ਹੈ ਨੋ ਬੜਾ ਹੋਰ ਜੇ ਬੜੇ ਦੇ ਕੋਣ ਹੋਣ ਨੇ ਬੜਾ ਦਾ ਉਹੀ ਹੈ ਜੇ ਜਿੱਤੇ ਬੜਾ ਕੋਈ ਹੋਰ ਹੈ ਬੜਾ ਨਹੀਂ ਹੋ ਸਕਦਾ ਜਿੱਤੇ ਬੜਾ ਕੋਈ ਹੋਰ ਹੈ ਉਹ ਬੜਾ ਨਹੀਂ ਹੋ ਇਸ ਕਰਕੇ ਹਰ ਜਿਹੜ ਕੇ ਬੜਾ ਜੇ ਬੜਾ ਹੁੰਦਾ ਹਰ ਜਿਹੜੀ ਜੁੜਨ ਦਾ ਦੋਰੀ ਉਹ ਬੜਾ ਉਹ ਤੋਂ ਬੜਾ ਵੀ ਕੋਈ ਹੈ ਦੱਸੋ ਸੰਦੇਸ਼ ਸਮਝਦੇ ਵਾਜ ਜਿਹੜਾ ਹੱਥ ਤੋਂ ਬੜਾ ਹੈ ਪੂਰਨ ਪ੍ਰਭੂ ਉਹਦੇ ਨਾਲ ਉਹ ਸੰਸਾਰ ਬੜਾ ਹੈ ਉਹ ਛੋਟਾ ਜੇ ਇੱਥੇ ਇਹ ਤਾਂ ਛੋਟਾ ਜੇ ਇੱਥੇ ਤਾਂ ਛੋਟਾ ਉਹ ਉਹਨੂੰ ਬੜਾ ਕਹਿੰਦਾ ਫਿਰ ਇਸ ਕੰਟਰੋਵਰਸੀ ਦਾ ਹੱਲ ਜੇ ਹੁੰਦੀ ਹੂੰ ਦੋ ਬੜੇ ਹੋ ਜਾਂਦੇ ਫਿਰ ਜੇ ਪੂਰਨ ਕ੍ਰਮ ਨੂੰ ਬੜਾ ਮੰਨ ਲਈਏ ਫਿਰ ਹਰ ਜੇੜ ਬੜਾ ਨਹੀਂ ਹੁੰਦਾ ਹੂੰ ਜਦੋਂ ਇਹ ਵੜ ਗਿਆ ਤਾਂ ਉਹ ਤਖੜੀ ਮਹਰੀਦਾ ਇੱਕ ਤਰ੍ਹਾਂ ਦਾ ਮੰਨਦਾ ਕੋਸ਼ਾ ਹੋਣਾ ਚਾਹੀਦਾ ਪੂਰਨ ਕ੍ਰਮ ਨੂੰ ਜੇ ਇਹ ਗੱਲ ਕਹਿੰਦੇ ਕਿ ਹੈ ਮੇਰੇ ਕੋ ਬਸ ਤਰੇ ਪਰੰ ਗਾਣੀ ਰੇ ਨਾਹ ਤੇ ਲਗ ਰੂ ਇਹ ਜਾਂਦੇ ਚੇਲਣਾ ਹੋਂ ਨੌ ਤਾਂ ਚੇਲਾ ਤੂੰ ਸਤਗੁਰੂ ਮੈਂ ਨੌ ਤਾਂ ਚੇਲਾ ਨਮਾ ਜਨ ਹੈ ਚੇਲਾ ਕਾਏ ਕਬੀਰ ਬਿਲਖਤ ਦੀ ਬੇਲਾ ਇਹ ਤਾਂ ਅਨਸਰ ਕਹਿ ਦੇਣਾ ਨੌਜਵਾਨ ਕੋਣ ਕਰ ਗੁਰੂ ਜੀ ਨੂੰ ਜਿਆਦਾ ਹੋਣਾ ਜਾਂ ਹੁੰਦਾ ਇੱਥੇ ਹੋਇਆ ਤੇ ਬੜਾ ਦਿਨ ਆਉਂਦਾ ਹੁਣ ਬੜੀ ਤਕੜੀ ਹੈ ਪਾਕੇ ਨਾਲ ਕੋਈ ਇਹ ਜਿਹੜੇ ਹੋਣ ਬਸਾਰਾ ਕਿ ਦੂਜੇ ਜਿਵੇਂ ਅਸੀਂ ਦੂਜਿਆਂ ਨੂੰ ਪੜਦੇ ਆ ਸਾਡੇ ਵੀ ਪੜਨ ਵਾਲੇ ਹੈਗੇ ਨੇ ਬਹੁਤ ਬਰੀਕੀਆਂ ਪਈਆਂ ਨੇ ਜੇ ਇਹ ਭੁਜਾਰਤਾ ਨਹੀਂ ਹੋਊਗੀ ਇਹ ਤਾਂ ਥੇਗਾ ਲੈ ਫਿਰ 30 ਬੰਦਾ ਕਹਿੰਦਾ ਸਾਲ ਹੋ ਗਏ ਤੇ ਆਹ ਸਵਾਲ ਕਰਦਾ ਜਿਵੇਂ ਤੁਹਾਡੇ ਕੋਲ ਨਹੀਂ ਮੇਰੇ ਸਾਹਮਣੇ ਕਦੇ ਗੱਲਾਈ ਦੀ ਆਜੋ ਸਤਗੁਰ ਕਰਕੇ ਆਦੀ ਹਾਂ ਮੇਰਾ ਸਾਧੂਰ ਦਾ ਰੋ ਸ਼੍ਰੀ ਗੁਰਦੇਵ ਦਾ ਸ੍ਰੀ ਗੁਰਦੇਵ ਦਾ ਉਹ ਜਿਹੜਾ ਹੁਣ ਜਪੇ ਛੋਟਾ ਅਸਮ ਦੇ ਵਿੱਚ ਹੋ ਪਰ ਦੋਵੇਂ ਓਰੂ ਵੀ ਹੈ ਅੱਜ ਨਾਲ ਪਾਸ ਹੈ ਕਿ ਉਹ ਮਨ ਦੀ ਛੋਟਾ ਤੇ ਮਨਸਕਾਰ ਵੀ ਹੈ ਸ੍ਰੀ ਗੁਰਦੇਵ ਨਾ ਹੋ ਗੁਰਦੇਵ ਨਮਸਤ ਉੱਥੇ ਦੋ ਤਨ ਤੇ ਲਾਹ ਗੰਗਾ ਨਾਮ ਹੋਇਆ ਕਹਿੰਦੇ ਨੇ ਨਾ ਤਨ ਤੇ ਲਾਹ ਕੇ ਜਦ ਵਿੱਚ ਜਨਮ ਇੱਥੇ ਹੋਇਆ ਉਹਨੂੰ ਬੜਾ ਸੇ ਮਗਾ ਸਮਝੋ ਤੁਸੀਂ ਪੂਨੋ ਨੂਨ ਕਰ ਬਣਿਆ ਜਦੋਂ ਬਣਿਆ ਨਾ ਪਰ ਉਹ ਲੇਟੈਸਟ ਆ ਹੋ ਹਾਂ ਨਾਸ਼ਟ ਜੇ ਅਗਰ ਨਾਸ਼ਟ ਪਰ ਐਕਚੁਅਲੀ ਹਰ ਹਰ ਜਿਹੜੇ ਨਾਲੋਂ ਵੱਡਾ ਆ ਇਹ ਪੂਨੋ ਨੂਨ ਵੀ ਉਹ ਇਹਦਾ ਮਾਤਰਾ ਰਕੀ ਗਈ ਉਹਦਾ ਉਹਨਾਂ ਸੱਚ ਕਰਨ ਵਾਲਿਆਂ ਮਤਲਬ ਹੈ ਹਾਂ ਇਹ ਉਹ ਦੁਨੀਆ ਜਿਹਾ ਰਹੇ ਜਿਹਨਾਂ ਦੀ ਸਤਿ ਭਗਤ ਬਰਾਬਰ ਆ ਤੇ ਜੀਹਦਾ ਉਹ ਤੇ ਹੀ ਮੁਟਾ ਰੋਹੀ ਹਾਂ ਦਾ ਹੈ ਵੀ ਉਹ ਤੇ ਦੂਆ ਪੱਖ ਰਹਿ ਗਿਆ ਸੀ ਕਹਿੰਦੇ ਇੱਕ ਪੱਖ ਤਾਂ ਤੁਸੀਂ ਦੇ ਲਿਆ ਉਹ ਮਰਦਾ ਵੀ ਝੋਟਾ ਅਕਲ ਦਾ ਵੀ ਝੋਟਾ ਉਹਨਾਂ ਨੂੰ ਗਣਕਾਇਕ ਜੀ ਜੀ ਦੱਸਦੇ ਆ ਅਸਾਂ ਦਵਿੰਡ ਛੋਟਾ ਉਮਰ ਦਾ ਵੀ ਛੋਟਾ ਉਹ ਵੀ ਛੋਟਾ ਛੋਟਾ ਹੀ ਨੌਤਾਂ ਕੇ ਲਾਗੇ ਹਰ ਤੇ ਨਮਾ ਜਮਿਆ ਹੋਇਆ ਇੱਥੇ ਸਤਗੁਰੂ ਜੀ ਬਤਾ ਗਏ ਤਾਂ ਇਹ ਵੱ ਤੋਂ ਵੱਡਾ ਸਤਗੁਰੂ ਇੱਥੇ ਜੇ ਉਹ ਹੀ ਬਟਾ ਹੈ ਹੋਰ ਤਾਂ ਕੋਈ ਰੱਖਣ ਚਾਹਦਾ ਕਲਪਨਾ ਦੇਖੋ ਜੋ ਕੀਨੇ ਦੱਸਿਆ ਕਲਪਨਾ ਬੰਦ ਕਰਦਾ ਤੀਕਾ ਕਿਸੇ ਨੇ ਨਹੀਂ ਦੱਸਿਆ ਸਮਾਧੀ ਨਾਲ ਤਾਂ ਤੀਕਾ ਕਿਸੇ ਨੇ ਨਹੀਂ ਦੱਸਿਆ ਮੈਂ ਤਾਂ ਇੱਕ ਕਾਮਯਾਬੇ ਜੀ ਹੋਏ ਫਿਰ ਵੱਡਾ ਆਦਮੀ ਕਦੇ ਨਹੀਂ ਛਾਣਾ ਸਮਝਿਆ ਅਕਲ ਆ ਗਈ ਜੇ ਵੱਡੇ ਅਕਲ ਆਉਂਦੀ ਅਕਲ ਵਧੀਆ ਬੜੀ ਹਾਦਪੁਰ ਤਾਂ ਵੱਡਾ ਹੈ ਉਹਨੇ ਕਲਪਨਾ मत ਕਰੀ ਹੋਰ ਕਿਸੇ चीज ਤੋਂ ਹੋਈ ਨਹੀਂ ਜੋ ਉਹਨੇ ਬੰਦਰ ਦੱਸਿਆ ਜੋ ਕੋਨੇ ਕੀਤੀ ਉਹਦੇ ਨਾਲ ਮੈਂ कामयाब ਹੋ ਗਿਆ ਤੁਹਾਨੂੰ ਬੋਲਦੇ ਕਲਪਨਾ ਮਤ ਕਰੀ ਠੀਕ ਹੈ ਹੋਰ ਇੰਨੇ ਸਤਗੁਰ ਨੇ ਉਹ ਮਤ ਆਂਦੀ ਉਹ ਉਹਨਾਂ ਜੋ ਬੋਲ ਤਾਂ ਇਹ ਕਰਕੇ ਉਹ ਜਾ ਸਕਦੇ ਸਤਗੁਰ ਦੀ ਬਾਣੀ ਸਫਲ ਆ ਨਾ ਸੇਵਾ ਸਫਲ ਆ ਸਤਗੁਰੂ ਦੀ ਬਾਣੀ ਸੱਤ-ਸੱਤ ਕਲ ਮੰਨੂ ਕੋ ਸਿੱਖੋ ਇਹਦੇ ਵਿੱਚ ਉਹ ਵੀ ਜਿਹੜਾ ਜਵਾਬ ਆਪ ਨੂੰ ਬਾਰ-ਬਾਰ ਅੰਦਰ ਵੀ ਬਾਹਰ ਦੇ ਗੁਰੂ ਦੀ ਲੋੜ ਨਹੀਂ ਬਾਹਰ ਗੁਰੂ ਦੀ ਲੋੜ ਨਹੀਂ ਅੰਦਰ ਵਿੱਚ ਬਾਹਰਲੇ ਗੁਰੂ ਨਾਲ ਨਾ ਐਟੈਕ ਕਰਦੇ ਗਏ ਦਾ ਉਹ ਅਸਲ ਵਿੱਚ ਇਹੀ ਪ੍ਰੋਬਲਮ ਆ ਰਹੀ ਹੈ ਕਿ ਸਤਗੁਰੂ ਦੇ ਖਾਲੀ ਕੋਈ ਨਹੀਂ ਅੰਦਰ ਦੇ ਸਤਗੁਰੂ ਨੂੰ ਬੁਲਾਈ ਕਰਕੇ ਚੱਲਦੇ ਨੇ ਸਾਧ ਗੁਰਦੇਵ ਜਿਹੜੀ ਫਿਰ ਗੁਰਦੇਵ ਗੁਰਦੇਵ ਆ ਹਾਂ ਅਜੇ ਕਾ ਲੋਕਾਂ ਨੇ ਵਾਅਦਾ ਹੀ ਲੋੜੀ ਪਰ ਹੋਵੇਗਾ ਸਹੀ ਜਿਹੜੇ ਡੁਪਲੀਕੇਟ ਬਣੀਆਂ ਨੇ ਉਹ ਜਿਹਨੇ ਜਿਹਨੇ ਬਣੀ ਬੈਠੇ ਨੇ ਕਿ ਹਰ ਕੋਈ ਸਹੀ ਉਹ ਹੈ ਉਹ ਹੀ ਕਹਾ ਸਕਦਾ ਜਿਹਨੇ ਸਤ ਗੁਰ ਦਾ ਉਹਦੇ ਪੱਜਾਂ ਨੂੰ ਹੋਵੇ ਆ ਹੋਵੇ ਨੂੰ ਆਪ ਜਾਂ ਨੂੰ ਬਾਜ਼ਾਰ ਤੋਂ ਮਿਲ ਗਿਆ ਹੋਵੇ ਗਿਆਨ ਗੁਰਾਂ ਤੋਂ ਨਹੀਂ ਸਤ ਗੁਰਾਂ ਭੱਲੇ ਯਾਰ ਸੂਰਾ ਸੰਗੋ 80 ਦਾ ਸਮਾਂ ਨਹੀਂ ਮੰਨ ਚਾਰ ਬਦਲ ਸਮਾਂ ਨਹੀਂ ਪਸਦਾ ਜੇ ਦਾ ਜਰੂਰੀ ਸਮਝ ਕੇ ਬੋਲਦੇ ਆ ਤਾਂ ਨਹੀਂ ਰਹਿ ਸਕਦੀ ਜੇਲਾ ਜਿੱਦਿ ਦੇਖ ਆਲਾ ਜਨਾ ਚ ਉਹਦੇ ਬਰਾਬਰ ਦੀ ਗੱਤੀ ਨਹੀਂ ਹੁੰਦੀ ਉਹ ਵੀ ਕਈ ਵਾਰੀ ਗੱਲ ਸਮਝ ਨਹੀਂ ਸਕਦਾ ਪੂਰੀ ਜੀ ਸਮਝ ਚਾਹੀਦੀ ਪੂਰੀ ਹੋ ਗਈ ਸਮਝ ਉਹਦੇ ਬਰਾਬਰ ਦਾ ਉਹਦੇ ਬਰਾਬਰ ਦੇ ਹੋਏ ਤੇ ਇਹ ਸਭ ਪੂਰੀ ਗੱਲ ਸਮਝ ਆਉਂਦੀ ਪੂਰੀ ਆ ਉਹ ਉੱਥੇ ਹੀ ਤੇ ਖੜ ਕੇ ਦੇਖੋ। ਜੇ ਸਰਾਇਦਾ ਨਾ ਨੀਵੇ। ਜੀਦਾ ਅੱਖਾਂ। ਐਵੇਂ ਉਤਨੀ ਵੀ ਕੀ ਹੋਈ ਪੜ੍ਹ ਕੇ ਤੇ ਸਭ ਉਡੀ ਦੇਖ ਰਿਹਾ ਕਿ ਨਹੀਂ ਪੜ੍ਹ ਕੇ ਦੱਸ ਰਿਹਾ। ਤੋਂ ਫਰਕ ਹੈ। ਹਾਂ ਇਹ ਗੱਲ ਹੈ ਗੱਲ ਹੈ ਹਾਂ ਮੈਨੂੰ ਗੱਲ ਹਾਂ ਇੱਕ ਤਾਂ ਆ ਖੜਾ ਘੋਟੇ ਤੇ ਇੱਕ ਥੱਲੇ ਪੜਿਆ ਪੜ ਕੇ ਦੱਸਦਾ ਉਹ ਪੁੱਤਰੇ ਆਈ ਗੱਲ ਆ ਥੱਲੇ ਆਲੀ ਗੱਲ ਆ ਫਰਕ ਡੂਏ ਉਹ ਇੱਕ ਨੇ ਅੱਧੀ ਦੇਖੀ ਦੀ ਹੈ ਇੱਕ ਨੇ ਅੱਧੀ ਦੇਖੀ ਹੈ ਦੋਹਾਂ ਨੇ ਬਹਿਣਾ ਡੋਲਦੀ ਹੋਣੀ ਕੱਤੀ ਸੁਣੀਆ ਰੱਖੀ ਦੇਖੀ ਦਾ ਫਰਕ ਕੋਈ ਨਹੀਂ ਆਵਾ ਕਹਿੰਦੀ ਦੁਨੀਆ ਮੰਦੀਓ ਪਰ ਦੁਨੀਆ ਵਾਦੀ ਅੱਖੀ ਤੇਖੀ ਦਾਰ ਕੱਤੀ ਮੰਦੀਆ ਗਵਾਹੀ ਨਹੀਂ ਮੰਦੀ ਵਾਹ ਗਵਾਹ ਨਹੀਂ ਮੰਦੀ ਜੇ ਅੱਖੀ ਦੇਖਿਆ ਦੀ ਤਸ਼ਰੀਹ ਉਹ ਆ ਅੱਛਾ ਸੁਣੀਆ ਉਹ ਆ ਤੇ ਗਵਾਹੀਆਂ ਦੀ ਗਵਾਹੀ ਚਾਸ਼ਮ ਕੀ ਦੱਸ ਸਕੀ ਨਾ ਬੋਲਿਆ ਜੋ ਨੇ ਬਾਕੀ ਕਿਤਾਬਾਂ ਵੀ ਲੈ ਦੇਖਿਆ ਕੋਈ ਨਹੀਂ ਪੜਿਆ ਪੜਕੇ ਲਿਖਿਆ ਹਾਂ ਜਿਨਹਨ ਪੰਸਾਦ ਅਸਵ ਹਸ ਅਸਵਾਰੀ ਮਨ ਤਿਤ ਪ੍ਰਭ ਕੋ ਕਬਹੂ ਨਾ ਦੇ ਸਾਰੀ ਚਲ ਸੋਨਾ ਦਾ ਛੱਡੋ ਹੀਰੇ ਦਾ ਛੱਡੋ ਆਸਮ ਕੇ ਤਪਾਦ ਹੋ ਗਏ ਆਤੀ ਕੌਣ ਪਵੇਗਾ ਜਹਤੀ ਹੋਏਗੇ ਤਾਹੀਂ ਸਵਾਰੀ ਕਰੋਗੇ ਆਤੀ ਨਾ ਹੋਂਦ ਸਵਾਰੀ ਕਰ ਮਗਦੇ ਇਹ ਤਾਂ ਇਹ ਨਾ ਪੈਦਾ ਕੀਤੇ ਜਾ ਸਕਦੇ ਉਦੀ ਕਿਰਪਾ ਆਇਆ ਹਾਥੀ ਤੇ ਘੋੜੇ ਤੇ ਸਵਾਰੀ ਹੈ ਅਸ਼ਵ ਹੱਸ ਕੇ ਅੰਕੋੜਾ ਹੱਸ ਕੇ ਹਾਥੀ ਤੇ ਸਵਾਰੀ ਹੈ ਜਿਉਂ ਨੇ ਬਣਾਇਆ ਤਾਂ ਸਵਾਰੀ ਕਰਦੇ ਨੂੰ ਸਵਾਰੀ ਕਰਨ ਵਾਲਾ ਉਹਨਾਂ ਸੁਭਾਅ ਵੀ ਬਣਾਇਆ ਸੱਪ ਤੇ ਵੀ ਉਹ ਸਵਾਰੀ ਕਰ ਲੈਂਦਾ ਜੀ ਜਾਨ ਕਰ ਤੇ ਉਹ ਤੇ ਛੇਰ ਤੇ ਜਿਵੇਂ ਕਰਾਤੀ ਉਹ ਜਰਾ ਉਹ ਗਹਿਣੇ ਕੋਈ ਗੱਲ ਨਹੀਂ ਮੇਖਾ ਇਹ ਤੇ ਯਰ ਉਹਨੂੰ ਵੀ ਭਾਈ ਇਹਦਾ ਮੋੜ ਜਾਂ ਸੱਦਾ ਇਹਦਾ ਸਾ ਪੱਥਰ ਪੱਥਰ ਕਾ ਨੇ ਥਲੇ ਇਹਦੇ ਅੱਥੀ ਕਾਹੀ ਬਣੂਗਾ ਨਾ ਹੋਰ ਵੀ ਤੇ ਜੂਨਾ ਹੈਗੀ ਆਜ ਵਾ ਹਾਸਤਾਸ ਵਾਰੀ ਜੇ ਪ੍ਰਸਾਦ ਧੀਰ ਗੁਰਬਾਣ ਨਾਲ ਮਾਣ ਆਪਣੇ ਮਨ ਨੂੰ ਕਹੇ ਉਹਨੂੰ ਬਿਲਕੁਲ ਇੱਕ ਬਿਲਡਵਾ ਦੇ ਵੀ ਨਾ ਉਹਨੂੰ ਵਧਾਰ ਦੇ ਬੋੜਨਾ ਮਨੋਂ ਕੋ ਸਾਦੀ ਬਿਲਕੁਲ ਵੀ ਨਹੀਂ ਉਹਨੂੰ ਮਨੋਂ ਬਸਾਉਂ ਆਪਣੇ ਗੱਲ ਕਰਦੇ ਮੈਂ ਕੋਈ ਵਿਸਾਰੇ ਦੇਖੋ ਆਪਣੇ ਤੇ ਕਹੇ ਉਹਨਾਂ ਨੂੰ ਨਹੀਂ ਕੋਈ ਕਹਿੰਦੇ ਹੁਣ ਹੁਣ ਆਪਣੇ ਤੇ ਗੱਲ ਆਪਣੇ ਮੰਨੋ ਤੂੰ ਬਹੀ ਨਾ ਬਸਾ ਲਈ ਹਾਂ ਇਹ ਦੂਜੇ ਜੀ ਗਰੀਆਂ ਨੂੰ ਆਉਂਦੇ ਕਿਹਾਵੇ ਤੂੰ ਦੇ ਕੋ ਛੱਡ ਦੋ ਆਪਣੀ ਗੱਲ ਕਰ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਗ ਹੋਏ ਪ੍ਰੋਏ ਸਭ ਆਪਣੇ ਮਨਾਂ ਪਹਿਲੇ ਤੋਂ ਦੇਨੇ ਨਾ ਦੇ ਆਪਣੇ ਵਾਸਤੇ ਰੋਕਾ ਗੁਰੂ ਕੇ ਨਾ ਭੋਖਣ ਕੋਤੇ ਲੇਨ ਦਰਬਾਰ ਉਪੋਲਦੇ ਨੇ ਹਾਂ ਬੋਲਦੇ ਨਹੀਂ ਆਉਂਦੇ ਪਾਜੂ ਪਾਜਾ ਜੀ ਪਾਇਆ ਕੇ ਸਦੇ ਤਾ ਕਿ ਜਿੰਨੇ ਕੜਾ ਗੁੱਠੀ ਅਲ ਕਿਸੇ ਦੇ ਭਗਤ ਤੇ ਦੀ ਇਹ ਭਗਤ ਨੇ ਜਦੋਂ ਕਲਗੀ ਲਾਉਣ ਲੱਗਿਆ ਜਿਵੇਂ ਪਾਜਾ ਲਾਉਣ ਲੱਗਿਆ ਤਲਵਾਰ ਚੁੜਾ ਗਈ ਸੱਤਰ ਸਵੇਰ ਕਰ ਤੋਂ ਬੇਪਰੋਕ ਨਹੀਂ ਹੋ ਗਏ ਦੋ ਚੀਜ਼ਾਂ ਵੀ ਕਰਿਆ ਨੇ ਉਹ ਵੀ ਕਰਿਆ ਪਾਕਬੀ ਗਦੇ ਜਾਂ ਕਰਦੇ ਹੁੰਦਾ ਅਗਰ ਦਾ ਸਵਲ ਨਾਲ ਕਰਦੇ ਹੁੰਦਾ ਜਬਰਦਾਰ ਮﻘਾਬਲਾ ਪਾਕਤਾ ਨੇ ਜੀਤਾ ਜਬਰਦਾਰ ਮﻘਾਬਲਾ ਸਵਲ ਨਾਲ ਇਹ ਨਾ ਰਹੇ 19ਵੀਂ ਦੀ ਸਵਰਾਲੀ ਕਲਵਾਰ ਸੀ ਇਹਨਾਂ ਨੇ ਸਬਰ ਜਿੱਤਨੇ ਸੀ ਆਖੀ ਸੰਤ ਦੇ ਜਿਹੜੇ ਉਹਨਾਂ ਨਾਲ ਟਕੀ ਦਾ ਸਵਰਾਲੀ ਗੱਲ ਪਰ ਜਿਹੜੇ ਬੇਸਬਰੇ ਸੀ ਉਹਨਾਂ ਨਾਲ ਕਰਦੇ ਕੀ ਕਰਦੇ ਜਬਰਦਾਰ ਜਾਵਰ ਨਾਲ ਫੇਰੇਉਂ ਜਾਵਰ ਵਾਲੀ ਤਲਵਾਰ ਲੈ ਲਈ ਭਈ ਉਹ ਤਾਂ ਮੇਰੀ ਤਲਵਾਰ ਤੇ ਉਹ ਲਈ ਜਾਂਦਾ ਦੂਜੀ ਦੀ ਬੋਲੀ ਜਾਂਦਾ ਨਹੀਂ ਆ ਉਹਦਾ ਆਪਣੀ ਤਲਵਾਰ ਨਾਲ ਬਣਾਉਂਦਾ ਕਹਿੰਦਾ ਜਦ ਤੇਰੇ ਵਾਲੀ ਤੇ ਦੇਖ ਲੈ ਉਹ ਤੇਰੇ ਵਾਲੀ ਦੀ ਉਹ ਤੇਰੇ ਵਾਲੀ ਸਾਡੇ ਕੋਲ ਉਹ ਤੇਰੇ ਵਾਲੀ ਨਹੀਂ ਕਹਿੰਦੇ ਤੇਰੇ ਵਾਲੀ ਨਾਲ ਤੇਰੇ ਨਾਲ ਦੇਖ ਲੈਣੇ ਆ ਇਹ ਕਲਗੀ ਜਿਹੜੀ ਤਿੰਨ ਗੁਰੂ ਸਾਹਿਬਾਨ ਚਾਰਦੇ ਆਉਂਦੀ ਐ 6ਵੇਂ 7ਵੇਂ 8ਵੇਂ 9ਵੇਂ ਦੇ ਫੇਰੇ ਐ 10ਵੇਂ ਦੇ ਫੇਰੇ ਜਿਹੜੇ 6ਵੇਂ ਦੇ ਵੀ ਕਲਗੀ ਐ 7ਵੇਂ ਬਾਦਸ਼ਾਹਾਂ ਦੀ ਬਣ ਬਾਣੀ ਆਪਣੀ ਬਾਣੀ ਇਹ ਇਹ ਵਿੱਚ ਨਹੀਂ ਹੈ ਤੁਸੀਂ ਛੱਡੋ ਇਹਦੀ ਗੱਲ ਕਰੋ ਰਾਜ ਉਧਰ ਹੋਰ ਗੱਲ ਉਹ ਉਹ ਕੇ ਹਾਂ ਗੱਲ ਹੋ ਉਹ ਤਾਂ ਤਲਵਾਰ ਵੀ ਹੈ ਉਹ ਸਾਰਾ ਨਹੀਂ ਸੀ ਇਹਨੇ ਤਲਵਾਰ ਨਾਲ ਜੰਗ ਕੀਤੀ ਹੈ ਉਹਦੀ ਬਾਣੀ ਇਹ ਨੇ ਤਲਵਾਰ ਨਾਲ ਜੰਗ ਕੀਤੀ ਉਹਨਾਂ ਦੀ ਬਾਣੀ ਨਹੀਂ ਹੁੰਦੀ ਇਹ ਇਹ ਹਾਂ ਉਹ ਉਹ ਵੀ ਜੀ ਉਹ ਵੀ ਜੀ ਹੋਰ ਗੱਲ ਕਰ ਇਹ ਜਿਹੜੇ ਦਾਸਾਂ ਦੀ ਬਾਣੀ ਹੋ ਉਹ ਜਿਹੜੇ ਦਾਸਾਂ ਦੀ ਬਾਣੀ ਇਹਨੂੰ ਕਹਿੰਦੇ ਉਹਨਾਂ ਨੂੰ ਕੀ ਪਤਾ ਭਗਤਾਂ ਦੀ ਬਾਣੀਆਂ ਹੈ ਇਹ ਇਹ ਇਹ ਹੋਰ ਮੈਕਲ ਹੋਰ ਮੈਕ ਦਾ ਫਰਕ ਹੈ ਕੋਈ ਦਾ ਰਾਜਯੋਗ ਹੈ ਹੋ ਜੋ ਵੀ ਆਮ ਗਦਰ ਆਯੋਜਨ ਨਾਲ ਤਾਜ ਆਇਆ ਇੱਥੇ ਤਾਜ ਨਹੀਂ ਆਇਆ ਬੂਕਰ ਸਿੰਘ ਉਹ ਬਖਮੇਦਰਾਪਰੀ ਕਰੀ ਆ ਜਾਂਦੀ ਹੈ ਫਿਰ ਉਹ ਰਾਜਦਾ ਰਾਜਦਾ ਨਯਮ ਨਹੀਂ ਕਰਦਾ ਰਾਜਦਾ ਪ੍ਰਤੀਬਿਧੀ ਸਪੋਸਾਲਾ ਰ ਹੈ ਰਾਜਦਾ ਖੰਦਾਰ ਹੈ ਜਿਵੇਂ ਰਾਜੇ ਦੀ ਦਾਈ ਕਲਗੀ ਦਾ ਉਹਨੇ ਸ਼ਾਦੀ ਉਹਾਂ ਕਲਗੀ ਲਾਈ ਠੰਗਾ ਦੇ ਬਿਨਾ ਠੰਗਾ ਦੇ ਤੁਲੇ ਤੇ ਤੁਸੀਂ ਕਹੋਗੇ ਠੰਗਾ ਦੇ ਬਈ ਉਹ ਜਿਵੇਂ ਭਾਦੀ ਤੇ ਬਣਾਇਆ ਚਾਹਨਾ ਕਹਿਦਾ ਸੀ ਇਹ ਸਾਤੀ ਇਹਨਾਂ ਨੇ ਰਾਜਨਾ ਤਲਵਾਰ ਨਾਲ ਵੀ ਇਸਤੇਮਾਲ ਕਰਨਾ ਜਵਾਨ ਦੋ ਤਲਵਾਰਾਂ ਨਾਲ ਇਸਤੇਮਾਲ ਕਰ ਲਿਆ ਗਲੀਆਦੋ ਦੋ ਤਲਵਾਰਾਂ ਨਾਲ ਇਸਤੇਮਾਲ ਕਰੂਗਾ ਦੂਈ ਨਹੀਂ ਕਰਦਾ ਅੱਛਾ ਮੈਂ ਤਾਂ ਹੈ ਅੱਛਾ ਉਹ ਇਹ ਕਿਹਾ ਅਜਾਬ ਬਹਿਰਾਂ ਮੈਂ ਕਿਹਾ ਮੇਰੇ ਦਮਾਂ ਗਏ ਉਸ ਵਾਰ ਇਹਦੇ ਲਈ ਮਾਰੀ ਕਿਉਂ ਦੀ ਲੋੜ ਇਹ ਨਹੀਂ ਆ ਰਹੀ ਜੇ ਪਰਹਰ ਵੀ ਪਰਹਰ ਹਾਂ ਬੰਦ ਨਾ ਬੱਲ ਗਿਆ ਉਹ ਮਾਲ ਦਾ ਬਰੇ ਇਸ ਤੇ ਮਾਲ ਦਾ ਮਾਲਾ ਸਦਾ ਨਾ ਗਮਗਾਤੇ ਉਹ ਉਹ ਤੇ ਨਾ ਨੇ ਦਸੀ ਹੋਈ ਨਹੀਂ ਜਉ ਤੇ ਨਾ ਵੀ ਕੰਮ ਖਾਵੀ ਨੂਗਾ ਉਹਨਾਂ ਪਾਣੀ ਵਾਲੀ ਕਿ ਵਿਦਿਆਦਿਤਾ ਨਹੀਂ ਮੋਰ ਵੀ ਉਹ ਮੇਰੇ ਤੇ ਪਰ ਉਹਨਾਂ ਦੇ ਉਹਨਾਂ ਦੀ ਐਹ ਜੀ ਹੁੰਦੀ ਆ ਸਾਡੀ ਬੋਲੀ ਆਹ ਹੈ ਉਹਨਾਂ ਦੀ ਬੋਲੀ ਆਹ ਹੈ ਉਹਨਾਂ ਦੀ ਬੋਲੀ ਦਾ ਵੀ ਫਰਕ ਆ ਮਹਾਨੀ ਭਾਸ਼ਾ ਦਾ ਵੀ ਫਰਕ ਆ ਸ਼ਾਸਤਰੀ ਭਾਸ਼ਾ ਉਹਨਾਂ ਦੀ ਬ੍ਰਜ ਭਾਸ਼ਾ ਸ਼ਾਸਨ ਕਰਨਾ ਉਹਨਾਂ ਨੇ ਦੁਨੀਆ ਦੇ ਗੁਪਤ ਗarnia ਲਗਾ ਭਾਗ ਭੀ ਭਾਸ਼ਾ ਹੋ ਦੁਨੀਆ ਦੇ ਰਾਜਨੀਕਾਲਾ ਉਹ ਭਾਸ਼ਾ ਦਾ ਨੀ ਕੋ ਤਾਂ ਫਰਕ ਆਏਗਾ ਇਹਦਾ ਵਾਹੂ ਲਾਗੋ ਤੋਂ ਬਸ ਲਿਛਤ ਰੇਤ ਰੇਤ ਅਸੋ ਬਸ ਸਾਸਰੀ ਭਾਸ਼ਾ ਨੂੰ ਭਾਸ਼ਾ ਭਾਸ਼ਾ ਹੀ ਹੈ ਹਾਂਜੀ ਭਾਸ਼ਾ ਵੀ ਨੋ ਜਿਆ ਪੀਨੋ ਪੱਗੁਰਮੀ ਜੇ ਕਹਿੰਦੇ ਆ ਜੇ ਪੰਜਾਬੀ ਗੁਰੂ ਗ੍ਰੰਥੀ ਦਾ ਗੱਲ ਹੈ ਨਾ ਗੁਰੂ ਕੀ ਨਹੀਂ ਆਲਾ ਕੇ ਪੰਜਾਬੀ ਹੈ ਐਵੇਂ ਬੜੀ ਪਾਸ਼ਾ ਸਾਖਤਰੀ ਪਾਸ਼ਾ ਇੱਕੋ ਹੀ ਗੱਲ ਛਾਸਰ ਜਿਹੜੀ ਪਾਸ਼ਾ ਨਾ ਉਹ ਹਿੰਦੀ ਪਾਸ਼ਾ ਹੈ ਆਪਣੇ ਜਿਹੜੀ ਹਿੰਦੀ ਹੈ ਜਿਹਨੇ ਸੰਤ ਉਹਦਾ ਅਰਬੀ ਦਾ ਫਾਰਸੀ ਦਾ ਬਾਅਦ ਜੁੜਦੀ ਹੈ ਇਹ ਤਾਂ ਇਹ ਜਿਹੜੀ ਭਾਸ਼ਾ ਹੈ ਇਹ ਇਹ ਬਹਾਂ ਕੋਈ ਕਤਨੀ ਬਣਾ ਕੇ ਇਹਦੇ ਬਾਰੇ ਅਕਵੋਤ ਜੀ ਕਦੀ ਦੇ ਇਲਾਹੀ ਅਕਵਰ ਸ਼ਾਹ ਇਖਲਾਕ ਉਹੋ ਇਸੇ ਫੂਟ ਹੋ ਗਈ ਪੈਨ ਨਹੀਂ ਉਹ ਤਾਂ ਹੋ ਗਈ ਜੀ ਅਬਰਾਹਮ ਸਾਹਤਾ ਆਪਣੇ ਨੇ ਸੀ ਉਹ ਬੋਲਦੀ ਤਾਂ ਚਲੋ ਗਮਾਂ ਜੀ ਦੀ ਥੋੜੀ ਹੋ ਜਾਣ ਦਿੱਤੇ ਪਰੇ ਕਿਦੇ ਰਹਿਣ ਨਾਲੇ ਆ ਗਏ ਇਹ ਬੋਗਲਾ ਗਏ ਇਹ ਫੇਰ ਸਾਡਾ ਫਾਸਲਾ ਉਹਨਾਂ ਨੇ ਆਗੇ ਦਿਸ ਚੁਰਾਇਆ ਬੁਝ ਉਝ ਨਹੀਂ ਇਹ ਕੱਲ ਠੀਕ ਹੈ ਵੀ ਇਹਨੂੰ ਮਹਾਨ ਕੋ ਜਨਮ ਦੇ ਸਾਂਖੇ ਵਿੱਚ ਬਿਚੋਏ ਇਹ ਕਿਲੀ ਹੈ ਜੀ ਚਾਹ ਸੀ ਭਾਜਾ ਨਹੀਂ ਇਹਦੀ ਅਰਬੀ ਫਾਰਸੀ ਜਾ ਰਹਾ ਹੈ ਖਾਰਾ ਸੀ ਰੱਤ ਹੈ ਜਾ ਰਹਾ ਹੈ ਖਾ ਰਹਾ ਸੋ ਰਹਾ ਹੈ ਉਰਦੂ ਜੋ ਆਇਆ ਹੈ ਸਾਜਦਾ ਹੈ ਕੋਕ ਤੇ ਕੋਕ ਉਹ ਤਾਂ ਪਾਛੀ ਹੋ ਰਿਹਾ ਉਹ ਨਹੀਂ ਕਹਿਣਾ ਉਹਨੂੰ ਇਹ ਤਾਂ ਨਹੀਂ ਜਾਈਦਾ ਸੀਗਾ ਫੇ ਇਹ ਪਾਛਾ ਬਣਾਈ ਹੈ ਜਿੱਥੇ ਵਿੱਚ ਸੁਖ ਦੇ ਲੱਭ ਜਿਆਦਾ ਨੇ ਭਾਰੂ ਦੇ ਉਦੋਂ ਵਿੱਚ ਅਰਥੀ ਦੇ ਜਿਆਦਾ ਨਿਕਲੀ ਸੰਸਕ੍ਰਿਤ ਵਿੱਚ ਨਿਕਲੀ ਹੈਂ ਦੀ ਨਿਕਲੀ ਨਹੀਂ ਹੈ ਨਹੀਂ ਇਹ ਉਹ ਦਾ ਸਦਕਾ ਤੇ ਵਿਚਾਰੇ ਮੇਲ ਦੋ ਭਾਸ਼ਾ ਬਣਦੇ ਦੋ ਪਾਸ਼ਾ ਹਰ ਨੇ ਉਦੋਂ ਦੋੜੇ ਜਿੱਤਦੇ ਨੇ ਤਾਂ ਹਿੱਤ ਦੀ ਲੌਫ ਦਾ ਹਿੰਦੀ ਜਿੱਤ ਦੀ ਵੀ ਤੋਂ ਜੀ ਵਨ ਆਇਆ ਜਿੱਤ ਇਹ ਤੇ ਅਸੀਂ ਦੇ ਲੋਕਾਂ ਦੀ ਜਿੱਤ ਵੀ ਲੌਫ ਦਾ ਇਹਨਾਂ ਦਾ ਆ ਚੱਪ ਜਾ ਫੜੇ ਬਿਹਾਰ ਦੇ ਵਿੱਚ ਟੱਪ ਜਾ ਪਰਲੇ ਪਾਸੇ ਉਹ ਮਿਲਦਾ ਹੀ ਨਹੀਂ ਉਹ ਕੋਈ ਜੁਰੀਏ ਕੋਈ ਹੈ ਇੱਧਰ ਉੜੀਸਾ ਵਗੈਰਾ ਜਾ ਕੇ ਉੜੀਆ ਆਦੋ ਬਦਾਇਤ ਮੁੜਿਆ ਹੋ ਰਿਹਾ ਕੋਈ ਗਾਂ ਚਾਇਨਾ ਦੀ ਪਹਾੜ ਵਰਗੀ ਹੈ ਹੋ ਰਿਹਾ ਪਰ ਕੱਤੇ ਦੇ ਵਿੱਚ ਉਹ ਇਲਾਕਾ ਹੈ ਉਹੀ ਹੈ ਉਹ ਮੰਦਰ ਬੰਨਦੀ ਬੁੰਦੀ ਜਿਹੜੇ ਉਹ ਪਹਾੜਾ ਮੋੜੀ ਹੋਏ ਉਹ ਉਹ ਲੱਗਦਾ ਉਹਨਾਂ ਦੀ ਪਹਾੜਾ ਹੀ ਲੱਗਦਾ ਪਰ ਉਹ ਜਿਹੜਾ ਆਉਣਾ ਜਿਹਨਾਂ ਨੂੰ ਕਹਿੰਦੇ ਨੇ ਤਾਂ ਕਹਿੰਦੇ ਉਹ ਬੇੜ ਦੇ ਤੇ ਫੜੇ ਨੂੰ ਦਾ ਸੁਪਰ ਗਿਆਨੀ ਲੱਗਦਾ ਗਵੇਦ ਦੇ ਰਾਸ ਤੇ ਨੇ ਇਹਨਾਂ ਨੇ ਸਭਕੀਆਂ ਵੀ ਬਦਲਤੀ ਹੋ ਲੋ ਸਭਕੀਆਂ ਬਦਲੀਆਂ ਤਾਂ ਨਹੀਂ ਹੈ ਉਹੀ ਜੋ ਅੱਜ ਹੋ ਰਿਹਾ ਪ੍ਰਚਾਰ ਵੀ ਛੱਡ ਗਏ ਛੱਡ ਗਏ ਸਭ ਕੁਝ ਛੱਡ ਗਏ ਉਹ ਤਾਂ ਖੁਦ ਕੋਈ ਕਹਦਾ ਇਹਨਾਂ ਨੇ ਕੁਛ ਵੀ ਨਹੀਂ ਹੈਗਾ ਘਰ ਮੈਂ ਨਹੀਂ ਉੜੇ ਰੋ ਕਾਇਤਾ ਉਹਨਾਂ ਸਮੁੱਚੀਆਂ ਨੇ ਜਮਾ ਅਸਾਨ ਕਦੇ ਪਾਪ ਨਹੀਂ ਲਿਖਿਆ ਉਹ ਕਹੀ ਜਾਂਦਾ ਉਹ ਜਿਹੜਾ ਉਹ ਮਜ਼ਦੂਰੀ ਵਾਲੀ ਦੀ ਮਾਰ ਕਰਦੀ ਸੀ ਇਹ ਕਹਿੰਦਾ ਵੀ ਇਹ ਦੇਖ ਤੋਂ ਸਾਚਾ ਦੇ ਕੋਈ ਖੱਟੀ ਹੋਈ ਨਹੀਂ ਹੋਈ ਹੀ ਫੇਡੂਕੀ ਸਬੂਤ ਵੀ ਹੋਏ ਪੁਰਾਣੇ ਦਾ ਲਿਖਿਆ ਉਹ ਕੁਝ ਹੀ ਦੱਸ ਲਿਆ ਮੇਰਾ ਉਹ ਜਵਾਨੀਦਾਰ ਬੰਦੇ ਕੋਲ ਗਿਆ ਜਿਹੜਾ ਇਹਨਾਂ ਦਾ ਧਰਮ ਸਭ ਜਵਾਨੀ ਦੀ ਗ੍ਰੰਥ ਤੋਂ ਦਾਤੂ ਇਹ ਵਾਚੇ ਲਿਖਿਆ ਹੋਇਆ ਹੈ ਇਹ ਡੁਪਲੀਕੇਟ ਹੈ ਗ੍ਰੰਥ ਦਾ ਹਵਾਲਾ ਨਹੀਂ ਨਾ ਆਪਣੀ ਬਿਨੋਦ ਦਾ ਹਵਾਲਾ ਲੁਕਾ ਜੋ ਅਜੇ ਬਿਨੋਦ ਦਾ ਹਵਾਲਾ ਲੁਕਾ ਅਜੇ ਬਿਨੋਦ ਦਾ ਫੇਰੀ ਦੁੱਖ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਗਲ ਖੜਦੇ ਜੇ ਕੋਈ ਕਹੇ ਇਹ ਬਿਨੋਦ ਅਜੇ ਦੀ ਨਾਮ ਤਾਂ ਹੁੰਦਾ ਹੀ ਨਹੀਂ ਕੋਈ ਨਾ ਫੇਰਾ ਬੇਨ ਇਹ ਲੈ ਲੇਗਾ ਤੇ ਜੇ ਮੰਨ ਲਾਂਗੇ ਗਲ ਉਹ ਗਲਤੇ ਆਏ ਹੋਣੇ ਲਿਖੇ ਗਰੰਟਾ ਨਹੀਂ ਲਿਖੂਣਗੇ ਬੰਦੇ ਜੋ ਪ੍ਰਚਲਿਤ ਹੋਇਆ ਸਾਡੀ ਮਾਰੀ ਪੁਰਾਣੀ ਮਾਸਕ ਦੇਵੀ ਹਾਂ ਇਹ ਬਾਤ ਸਮਾਣਾ ਇਹ ਕਿਆ ਕਾ ਹੈ ਪੁਰਾਣਾ ਜਿਹਾ ਮਾਸਕ ਉਹ ਵੀ ਕੁਰਾਲ ਕੇ ਹੈ ਉਹਦੇ ਸਿਮਿਲਟੀਆਂ ਦੇ ਵਿੱਚ ਦੇ ਵਿੱਚ ਲਿਖਿਆ ਉਹਦਾ ਜਵਾਬ ਕੋਈ ਇਹ ਸੰਜ ਜਵਾਂਦੀਆਂ ਧਰਮ ਉਹ ਜਿਹੜਾ ਮੈਂ ਐਵੇਂ ਝੂਠੀ ਬੋਤਾ ਜਵਾਂਦੀਆਂ ਬੋਲ ਰਿਹਾ ਦੱਸਦੇ ਉਹਨੂੰ ਇਦਨਰ ਦੇ ਬਾਸਾ ਵੀ ਜਵਾਲੀ ਹੈ ਨਾ ਫਟਾਕਿਆ ਕਾ ਦਾ ਤਰ ਤੜਿਆ ਜਹੇਗਾ ਇਹ ਆ ਮਾਇਨਿਸਿਪਲਤਾ ਕੋਈ ਹੈ ਨਹੀਂ ਪਤਾ ਹੋਊਗਾ ਵੀ ਰਾਤ ਉਹ ਤੁੰਡੀ ਕੇ ਦਸੋ ਬਾਸਾ ਵਿੱਚ ਬੈਠ ਚੱਕ ਦੂਗਾ ਮੈਂ ਕਹੂਗਾ ਬੋਲਦੇ ਨਾ ਪਤਾ ਹੈਗਾ ਬਹੁਤ ਲੋਕਾਂ ਨੂੰ ਉਹ ਗੱਲ ਪਹਿਣਗੇ ਲੋਕ ਦੱਸਦੇ ਦੀ ਬੋਲਦੇ ਪਤਾ ਬਹੁਤ ਕੁਝ ਕਰਵਾਉਂਦਾ ਹੈ ਯੂਨੀਵਰਸਿਟੀ ਪਤਾ ਨਹੀਂ ਨਾ ਦੱਸਦੇ ਦੀ ਬੋਲਦੇ ਮੇਰਾ ਉਹ ਜੇ ਲੋੜ ਆਇਆ ਪਤਾ ਕਿ ਜੇ ਨੇ ਅਗਲਾ ਨਿਕਲ ਹੋ ਵੀ ਟੋੜਾ ਦਾ ਉਹ ਫਿਰ ਵੀ ਜੀ ਖੋਈ ਜਾਊਗੀ ਉਹ ਜਾਣੇ ਜਿਹੜੇ ਖਾਤੇ ਵੀ ਮੇਰੇ ਕਰਾ ਜਾਊ ਆ ਦੱਸਦੇ ਨੇ ਬੜੀਆਂ ਗੱਲਾਂ ਤੇ ਚਲ ਉਹਦਾ ਖਾਤਾ ਤੋਂ ਵੀ ਬੜੀ ਗੱਲ ਹੈ ਤੇ ਚੌਲ ਦੀ ਮਾਸਮਾਨੀ ਚੌਕ ਤੋਂ ਨਾਲ ਗਏ ਹੋਣੇ ਫਿਰ ਬਾਹਰ ਵਾਲੇ ਮਾਸ ਹੈ ਆ ਜੀ ਸ੍ਰੀਰਮਾਨ ਆ ਟੋਡਰ ਮਾਰਨਾ ਸ੍ਰੀ ਨੀਯ ਮਾਇਆ ਹੀ ਮਾਰਾ ਬੁੱਤੀ ਵੀ ਮਾਰਾ ਆ ਗੋਸੋਈ ਮਾਰਾ ਫਿਰ ਉਹ ਹੀ ਗੱਲ ਆ ਗਈ ਗੁਰਦੇ ਦੋਗੇ ਵੀ ਕਿਤੇ ਉਪੋ ਘੋੜੀ ਕੱਢ ਕੇ ਦੇ ਤੇਰੇ ਵਾਹਾਂ ਪੱਢ ਕੇ ਜਮਾਂ ਬੀਚੇ ਤੇ ਗਰੀ ਹੈਗੀ। ਬੂ ਘੋੜੀ ਅਮੀ ਰਾਤੀ ਆ ਕੇ ਦੇਖਿਆ ਕਰੋ। ਜਦੋਂ ਨੇ ਕਿਹਾ ਗੱਲ ਸੁਣੋ ਤੁਸੀਂ ਮਾਇਆ ਤੇ ਕੀ ਰਣਾ ਅਰਦੇ। ਆਪਾਂ ਆਪਾਂ ਨੇ ਕਿਹਾ ਬਈ ਪੈਸੂ ਕਿਹਨੂੰ ਕਹਿਣਾ। ਕੁਰਬਾਨੀ ਆ ਜਿਤ ਨੂੰ ਸੋ ਤੁਸੀਂ ਤੇ ਹੋਏ ਪਹਿਲਾਂ ਮਾਇਆ ਤੋਂ ਪਹਿਲਾਂ ਵੈਸ਼ਨੂ ਆਇਆ ਮਾਇਆ ਬਾਹਰ ਹੈ ਮਾਇਆ ਖਾਲੀ ਬਾਗ ਰਹੇ ਇਹ ਤਾਂ ਬਹੁਤ ਗਾਹਣੀ ਮਾਰੀ ਗਾਣ ਲੱਗੇ ਕੋਈ ਜਰਾ ਅੰਦਰ ਵਿੱਚ ਦੋ ਚਾਰ ਰੱਖੇ ਨਹੀਂ ਉਹ ਕਰੂੰਗਾ ਸਾਰੇ ਸਾਰੇ ਬਚਾਈ ਜਾਈ ਜਾ ਰਹੇ ਹੈ ਛੇਤੀ ਬਾਹਰ ਕਢਾ ਰਹੇ ਹੈ ਛੇਤੀ ਬਾਹਰ ਆ ਰਹੇ ਹੈ ਬਕਨੇ ਦੇ ਘਮ ਹੈਗੀ ਹੋਈ ਤੇ ਹਾਲੀ ਹੋਈ ਹੈ ਇਹ ਬਾਹਰੋਂ ਕੁਝ ਹੋ ਰਿਹਾ ਅੰਦਰ ਕੁਝ ਹੋ ਰਿਹਾ ਹਰ ਜਗ੍ਹਾ ਅੰਦਰ ਕੁਝ ਹੋ ਰਿਹਾ ਬਾਹਰ ਕੁਝ ਹੋ ਰਿਹਾ ਜਦੋਂ ਗਾ ਵਿਸ਼ਣ ਕੀ ਮਾਇਆ ਤੇ ਹੋਇ ਕਦੀ ਕੋਈ ਬੈਸ ਨਾ ਹੋਵੇ ਭਾਇਵਾ ਸੋਈ ਤੇ ਇਹ ਮਾਇਆ ਤੋਂ ਫਰੇਗਾ ਨਾ ਤਾਰੋ ਭੈਣੂ ਆ ਜੇ ਮਾਇਆ ਦੇ ਰੜੇ ਆ ਗਿਆ ਤਾ ਫੈਸਪਟ ਰਹੇਗਾ ਫਿਰ ਸੰਸਾਰ ਕੋਈ ਬੈਸ ਨਾ ਹੋਈ ਜੀ ਹੋਈ ਨਹੀਂ ਸਕਦਾ ਤੇ ਜੀਵਨ ਜਿਹਦਾ ਰਾਸਾ ਹੱਦ ਹੈ ਉੱਥੇ ਫਿਰ ਬੈਸਿਕ ਨਾ ਹੋ ਜਾਈ ਪਾਣੀ ਦਾ ਤੇ ਰਾਦੋ ਛੋੜ ਹੋਏ ਜਿੰਦਾ ਨਹੀਂ ਤੂੰ ਅਨਕਵਾਦ ਗਵਾਤ ਤੂੰ ਸਿਰਫ ਹਰ ਦੰਨਾ ਹੋਇਆ ਆਂ ਤਾਂ ਸ਼ੁਰੂ ਚੱਕੀ ਜਗਾ ਲੋ ਨਹੀਂ ਰਸ ਤੋਂ ਵਾਲੇ ਤੇ ਤੇ ਰਾਦ ਉਥੇ ਰਾਦ ਨਾਏ ਦਾ ਰਾਦ ਦਾ ਐਸਾ ਕੋਈ ਸਿਆਣਕ ਨਾ ਨਹੀਂ ਪੈਦਾ ਹੁੰਦਾ ਪਾਣੀ ਦੇ ਬਿਨਾ ਜੀਵ ਨਹੀਂ ਪੈਗਾ ਹੁੰਦਾ ਤੇ ਪਾਣੀ ਮਾਰਦਾ ਤੋਇਆ ਕਹਿੰਦੇ ਬਹੁਤ ਦੱਛਾ ਤੋਇ ਬਹੁਤ ਬਕਾਲਾ ਸਾਰੇ ਮਾਰ ਤੋਏ ਤੇ ਨਿਕਲਿਆ ਗੱਡੀ ਕਿੱਥੋਂ ਆਈ ਜਾ ਜਿਹੜੀ ਦੁਨੀਆ ਜਗਾਂ ਦੇ ਢੇਰ ਪਏ ਨੇ ਟਰਾਲੀਆਂ ਭਰ ਕੇ ਫੜ ਜਾਂਦੇ ਨੇ ਉਹ ਕਿੱਥੋਂ ਆਈ ਪਾਣੀ ਚੋਂ ਨਿਕਲੀ ਇਹ ਅੱਜ ਨੂੰ ਆ ਰਹੇ ਆ ਜਾ ਲਾਉਣੇ ਉਹ ਦੇਖ ਲੈਦੇ ਪਾਣੀ ਕਿੱਥੇ ਫੇਰ ਦਰ ਦੇ ਵਿੱਚ ਆ ਦੇਖ ਲੋ ਵਾਲੇ ਵਾਲਕੇ ਆ ਵਾਲ ਕੀ ਕਹਾ ਜਿਹਦਾ ਫੜਤੀ ਪਾ ਕੇ ਦੇਖਦੇ ਥੱਲੇ ਬਹਿ ਦੇਖਣ ਨੂੰ ਤਾਂ ਵਧੀਆ ਲੱਗਦਾ ਮਾਇਆ ਤੋਂ ਜੋ ਬਿਚੀ ਇਸ ਹੋਈ ਤਾਂ ਤੇ ਜੋ ਕਿਤੇ ਹੈ ਕਿਤੇ ਹੈ ਜੀ ਮਾਇਆ ਬਰਮਾ ਜਾਓ ਕਿਤੇ ਜਦੋਂ ਸਮਾਈ ਉਹ ਮਾਗੋ ਉਹ ਤਾਂ ਥਾਰੀ ਉਹ ਥਾਰੀ ਉਹ ਤਾਂ ਉਹ ਇੱਥੇ ਦਾ ਮਾਰੀ ਕੋਲ ਦੀ ਬਾਹਰ ਸਾਡੇ ਉਹਨੂੰ ਥਾਰੀ ਉਹ ਤੜਾ ਅੰਬਰ ਉਹ ਵੀ ਤਾਂ ਮਰ ਵੀ ਕੀ ਲਿਆ ਐਸੇ ਬਰਦਾ ਬਾਹਰ ਹੈ ਅੱਜ ਉਹ ਆਪਣੇ ਪੀਦੇ ਆਪਣੇ ਉਹਦਾ ਨਾਮ ਹੈ ਕਿ ਤੱਬਰ ਹੈ ਬੈਜਨੂ ਦਾ ਚਲੋ ਬੈਜਨੂ ਮੇਰੇ ਤੇ ਫਿਨੈਸ਼ਨ ਦੀ ਹੋ ਤੀ ਕੋਲ ਚਲੋ ਬਾਅਦ ਯਾਨਕਪਤੀ ਡਿਜੀਟਲ ਕੋਈ ਨਹੀਂ ਹਰੇ ਚੌਂਲੀ ਜਾਣ ਦਾ ਫਿਰ ਫਿਰ ਇਹਦਾ ਦੂਰ ਦੇਲੇ ਜਾਣਗੇ ਉਹ ਹੋਰ ਵੀ ਇਹ ਗੱਲ ਤਾਂ ਸੱਚ ਦਾ ਸੱਚ ਕਰਦਾ ਸੱਚਾ ਹੋਇਆ ਹੋਇਆ ਪਹਿਲਾਂ ਉਹਦਾ ਜਿੰਨਾ ਜੋ ਖੋਜੇ ਸੋ ਪਾਵਾਂ ਜੋ ਖੋਜੇ ਸੋ ਪਾਵਾਂ ਇਹ ਗੱਲ ਉਹਨੂੰ ਸਮਝ ਸੀ ਉਹਨੂੰ ਇਹ ਉਹ ਵੀ ਇਹ ਨਹੀਂ ਉਹਨੂੰ ਸਮਝ ਹੋਰ ਵੀ ਤਾਂ ਬਹੁਤ ਬਹੁਤ ਹੋ ਗਿਆ ਬਹੁਤ ਕੁਝ ਹੋ ਗਿਆ जय प्रसाद बाग मिलक तना राग प्रोए सब अपने मन जय प्रसाद बाग बाग है कैसी दुकान गुरु भी है ज्ञान ਬਿਲਕੁਲ ਪਿਆ ਤੁਹਾਨੂੰ ਕੋਈ ਪਰ ਹੈ ਵੱਡੇ ਰਣ ਬਾੜਿਆਂ ਕੋ ਹੁੰਦੇ ਸੀ ਇਹ ਗੱਲਾਂ ਪਿਆਰ ਦੇ ਕੋ ਜਾਂ ਡੇਰੇ ਵਾਲਿਆਂ ਕੋਲ ਇਹ ਜਿੱਕਰ ਪਾਣ ਦੇ ਜੀ ਜਾਣੇ ਤੇ ਕੋ ਤੁਸੀਂ ਆਪਣਾ ਫੇਫਰੀ ਰੋਟੀ ਖਾਂਦੇ ਹੋ ਕਿ ਬਣੀ ਹੋਈ ਆ ਫਰੀਦਰੀ ਬਾਅਦ ਕਿਸੇ ਨਾਲ ਬਿਲਕੁਲ ਕੇ ਜਨ ਬੜਾਇਆ ਕੇ ਮਾਲਕ ਬਣ ਕੇ ਬਹਿ ਜੇ ਇਹਦੇ ਥੋੜੀ ਬਰੀ ਨਹੀਂ ਹੋ ਜਾਂਦੀ ਇਹ ਵਾਲ ਕਿਤੇ ਲੋਕ ਐਂ ਨਹੀਂ ਤੇ ਉਹਦੇ ਨੂੰ ਪ੍ਰੋਗਰਾ ਕਰ ਬਲ ਮੰਨ ਚ ਰਾਗ ਪ੍ਰੋਏ ਪਰ ਆਪਣੇ ਮਨ ਐਸੇ ਪ੍ਰਭ ਨੂੰ ਮਾਰ ਹੈ ਉਹਦੀ ਕਿਰਪਾ ਨਾਲ ਉਹਨੇ ਤੈਨੂੰ ਮਾਰਕ ਬਣਾਇਆ ਹਾਂ ਉਹੀ ਕਿਰਪਾ ਆਉਂਦੇ ਸੁਖ ਸੁਖਦਾ ਵਾਂ ਲੈ। ਉਹਨੂੰ ਆਪਣੇ ਮਾਝੇ ਨੂੰ ਸ਼ੁਕਰੀਆ ਵੀ ਅਦਾ ਕਰਦਾ ਰਹੇ ਪਰ ਉਹ ਤੇ ਰੱਖ। ਜੀ ਸਾ ਇਹ ਤੇਰੀਆ। ਲੋਕ ਕਹਿੰਦੇ ਵੀ ਦੁਗਨ ਤੇਰੀਆ। ਮੈਂ ਤਾਂ ਪੁੱਛੇ ਤੇ ਬਣਾ ਖੁਸ਼ ਤੇ ਵੀ। ਦਕਾਨੀ ਦਾ ਬਾਗ ਚਾਗੇ। ਬਈ ਖੇਤੀ ਬਟਦੀ ਤਾਂ ਫਰਦਾ ਕੋਈ। ਮੈਂ ਤਾਂ ਪੁੱਛੇ ਤੇ ਬਣਾਉਂ। ਇਹ ਕਰਵਾਦ ਜਿਹੜੇ ਦੇਫਾ ਕੀਤੇ ਜਾਂਦੇ ਐਵੇਂ ਵੀ ਪਾਇਆ ਗਏ ਇਹ ਵਿਚਾਰ ਇਹ ਸਿਰਫ ਇਹ ਹੋਊਗਾ ਹਮਸਾਰ ਮੇਰਾ ਅਕੜ ਹੋ ਗਈ ਜੇ ਨਾ ਹੋ ਜਾ ਉਹ ਫਿਰ ਜਿਆਦਾ ਫੁਰ ਕੇ ਫੜਵੀ ਜਾਂਦਾ ਜਿਆਦਾ ਟਾਈਰ ਫੁਰ ਕੇ ਭੜੇਗਾ ਨਾ ਜਿਆਦਾ ਨਹੀਂ ਫੁੱਲਣ ਦੇ ਅਰਦਾਸ ਨਹੀਂ ਮੈਂ ਭੜ ਜੂ ਇਹ ਬ੍ਰੈਂਦੀ ਨਾਲ ਹੀ ਬਾੜ ਦਿੰਦਾ ਫਿਰ ਆਹ ਜਦ ਆਇਆ ਨਾ ਉਹਦੀ ਆ ਬਲੱਡ ਫਰੇਜਰ ਆਈ ਹੋ ਜਾਂਦਾ ਉਹ ਡਰ ਜਾਂਦਾ ਨਾ ਇਹ ਜੇ ਜੇ ਤੈਰੀ ਮੰਤ ਬਣਤ ਬਣਾਈ ਉੱਠ ਤਾ ਬੈਠ ਤਾ ਸੱਦ ਤਸੇ ਤੇ ਆਈ ਆਹ ਜ਼ਰ ਹੁਣ ਧੀਰਾ ਚੱਲ ਇਹ ਵੀ ਬੰਦਾ ਤੂੰ ਉਹ ਤਾਂ ਨਾ ਦੇ ਵੀ ਬੰਦਾ ਜੇ ਤੈਰੀ ਬੰਤ ਬਣਾਈ ਐ ਤੂੰ ਦੱਸ ਕਿ ਤੂੰ ਬਣ ਗਈ ਬਣਤ ਬਣਾਈ ਦੇਲੀਵਾਂ ਦਾ ਜਿਹੜੀ ਅਜਰੀਦ ਕਹਿੰਦਾ ਨਾਲ ਵਾਂਸਤਾ ਨਹੀਂ ਪੜਿਆ ਸੀ ਜੋੜ ਕੇ ਦੇਲੀਵਾਂ ਦਾ ਨਾ ਕਿ ਇਹ ਕੋਈ ਨਹੀਂ ਚੈ ਤੁਆ ਸੇਨਾ ਜੋੜ ਕੇ ਕੁਨੀ ਅਲਿ ਦੇ ਆ ਬੋਲੀਆ ਵਾਂਣ ਮਾਟੀ ਦਾ ਪੁੱਤਰਾ ਕੈਸਾ ਮਹਿਸੂਸ ਕਰ ਫੇਰ ਆਪਣਾ ਸਾਹ ਅਸਾਹ ਮਹਿਲ ਰਿਆਂ ਪਿੱਛੇ ਹੋਰ ਕੁਝ ਗਾਇਬ ਹੈ ਕੋਈ ਉਹਦੀ ਵਜਾ ਨਾਲ ਇਹ ਸਰਕਲ ਚੱਲਦਾ ਦੌੜਾ ਤੇਰੀ ਬਾਤ ਹੋਲੇ ਬਣਾਈਏ ਬੱਤੀ ਵਾਲਾ ਕਿਹਦੇ ਨੇ ਇਹ ਵੀ ਬੱਤ ਦਿਕਾਣੀ ਜੋ ਵੀ ਹੈ ਆਪਣਾ ਜਾਲ ਰਿਉਥੇ ਚੱਲੀਏ ਮੈਂ ਤਾਂ ਹੁਕਮ ਹਾਜ਼ਰ ਤੇਲ ਵੀ ਕਿਸੇ ਦਾ ਬਹੁਤ ਵੀ ਕਹਦਾ ਜ਼ਾਇਬ ਬਣਦਾ ਸਲ ਮਾਰ ਕੇ ਚੱਲ ਰਿਹਾ ਵੇ ਬੰਸੈ ਜੀ ਨਾ ਤੇਰੀ ਮਰਜ਼ੀ ਵੀ ਜਿੱਦੂ ਮਰਜ਼ੀ ਚੱਲ ਪੁਗਣਾ ਇਹ ਜਿਹੜਾ ਬਣਾਈ ਆ ਉਹ ਵੀ ਦੇਖ ਲੈ ਕੌਣ ਆ ਇਹ ਉਖਾਸਲਾ ਤੇ ਥਿਆ ਚੌਕ ਤੇਰੀ ਬੰਦ ਬਣਾਈ ਜਾਂਦਾ ਤਾਂ ਤੇਰੀ ਬੰਦ ਤਾਂ ਫੇਰ ਕੋਈ ਦੇ ਕਰੂਗੀ ਬਣੀ ਭਾਈ ਇੱਥੇ ਤਾਂ ਬਣੀ ਨਹੀਂ ਤੇ ਕਿੱਥੇ ਬਣੀ ਉਹ ਪਤਾ ਹੀ ਨਹੀਂ ਬਦੂ ਫੋੜੀ ਤਾਂ ਪਤਾ ਨਹੀਂ ਹੈ ਤੇ ਆ ਕੇ ਥੋੜਾ ਚਲ ਨੇ ਮੈਂ ਤਾਂ ਕੰਠਾ ਬੁਣ ਲਿਆ ਹੈ ਜੀ ਜਨਾ ਆ ਸਾਡੇ ਫਸਲ ਹੋਈਏ ਦਵਾਈ ਨਹੀਂ ਕੀਤੀ 100 ਵਾਹਨ ਨਹੀਂ ਲੋੜ ਵਿੱਚ ਪਰ ਇਹਦੇ ਤੋਂ ਕੋਈ ਵਾਹਨ ਨਹੀਂ ਚੋ ਤੇ ਆ ਕੇ ਪਸਾ ਲਿਆ ਆਹ ਜਿਹੜੇ ਵੀ ਅਖੇਸਾਰੇ ਜਿਹੜੇ ਬਾਹਰ ਤੋਂ ਮਨ ਬਣਾਦੇ ਨੇ ਉਹ ਤਾਂ ਬਾਹਰ ਤੋਂ ਮਨ ਬਣਾਦੇ ਜੇ ਉਹਨੇ ਧਿਆਨ ਬੈਠ ਉਹਦੀ ਉਹਦੀ ਟਾਗਾਂ 'ਤੇ ਬੈਠ ਹੁੰਦਾ ਇਹ ਨਾ ਉਹ ਬੈਠਾ ਮੇਰੇ ਉੱਥੇ ਨਾ ਉਹ ਉੱਥੇ ਮੇਰੇ ਬੈਠੇ ਨਾ ਹੋਵੇ ਉਸ ਨਾਲ ਜੇ ਬੈਠੀ ਤਾਂ ਉਹ ਮਾਦਮ ਦੇ ਕੇ ਪੈਂਦਾ ਫਿਰ ਚਾਰ ਫੇਰ ਉੱਡਦਾ ਤਾਂ ਲਾਇਵ ਨਹੀਂ ਉੱਡਦਾ ਦੇਖਦਾ ਹੀ ਆ ਹਾਂਜੀ ਜਿਸੇ ਹੀ ਤੇ ਆਏ ਜੋ ਇੱਕ ਅਲੱਖਾ ਹੋਰ ਤਾਂ ਗੱਲ ਤੇ ਤੇ ਆਏ ਜਿਸੇ ਤੇ ਜੋ ਇੱਕ ਅਲੱਖਾ ਹੈ ਇੱਕ ਦਾ ਔਰ ਗੀਂਦਾ ਦੀ ਲੱਖਾ ਇੱਕ ਵੀ ਆ ਅਲੱਖਾ ਵੀ ਹੈ ਸਾਰੇ ਗੁਰੂ ਦੇ ਤਾਂ ਨਹੀਂ ਸਾਰੇ ਹੀ ਕਰਦੇ ਸਾਰੇ ਦੇ ਵੀ ਦੇਸੀ ਕਰਦੇ ਇਹ ਅਲੱਖ ਵੀ ਹੈ ਤੁਹਾਨੂੰ ਸੁਖ ਨਹੀਂ ਆਪਣਾ ਸੋਦ ਆ ਵੀ ਇਹਨਾਂ ਦਾ ਕੋਈ ਵੀ ਅਲੱਖ ਨਹੀਂ ਹੈ ਜੇ ਆਪਣੇ ਤੋਂ ਨੂੰ ਗੁਰੂ ਮੰਨਦਾ ਤਾਂ ਉਹਦਾ ਤਾਂ ਗੁਰੂ ਹੋਊਗਾ ਇਹ ਤਾਂ ਵਿਅਕਤੀ ਪੂਜਾ ਵਿਅਕਤੀ ਤਾਂ ਬਿਲਕੁਲ ਹੀ ਖਤਮ ਹੋ ਗਿਆ ਲੱਖੇ ਦੇ ਫਰੀ ਦੇ ਲੱਖੇ ਸਾਰੇ ਇਹੋ ਇੱਕ ਅਲੱਖ ਹੈ ਇਹੋ ਉਹ ਤੇ ਵੀ ਰੱਖਿਆ ਕਰਦੀ ਹੈ ਵੀ ਤੇ ਨੂੰ ਬਚਾਉਣਾ ਉੱਥੇ ਵੀ ਸੰਭਲ ਐਥੇ ਵੀ ਤੇ ਰੱਖਾ ਰક્ષਕਾ ਗਾਉਂਦੀ ਰੱਖਿਆ ਨੂੰ ਰੱਖਾ ਪੁਰੇ ਉਹ ਇੱਥੇ ਆ ਕੇ ਬਿਲਕੁਲ ਰਹਿਤਾ ਵੀ ਹੁੰਦਾ ਸੀ। ਨਿਕਲ ਨੂੰ ਕੋਈ ਥੋੜੀ ਜਿਹਾ। ਘੇਰ ਲਿਆ ਮਨੁੱਖ ਜੀ ਮੰਨਦੀ ਨਹੀਂ ਦਿਨਾਂ ਦੇ ਪਿੱਛੇ ਨਾ ਨਹੀਂ। ਘੇਰ ਲਿਆ ਮਨ। ਕੋਈ ਮੰਨ ਨੂੰ ਸੋਧਣਾ। ਤੂੰ ਕਹਿ ਵੀ ਭਾਈ ਮਾਇਤਾ ਹੈਗਾ। ਕਰਤਕਾਂ। ਪਦ ਕਰ। ਅਛਾ ਜਿਆ ਫੈਸਾਨਾ ਹੋਰ ਬੋਲੀ ਕਾ ਕੇ ਗੁਰਜਾ ਐਂਦੀ ਹੋ ਗਿਆ ਐਸਾਨਾ ਬਰੋ ਮੈਂ ਤਾਰ ਮਾ ਤਾਂ ਤਾਂ ਬਗਾਸੀ ਐਸਾਨਾ ਬਰੋ ਹੋਸ਼ੇਮੇ ਗੱਲ ਲੈ ਐਸਾਨਾ ਬਰੋ ਮੋਸ਼ਾਨ ਦੇ ਖਿਲਾਫ ਤਾਂ ਕਹਾਣੀਆਂ ਪੜਾਈ ਬੈਠਾ ਵੀ ਇਹ ਜਿਹੜਾ ਹੈ ਸਭ ਤੋਂ ਭੜਾ ਆਦਮੀ ਐਸਾਨਾ ਸਿਰੋ ਉਹ ਝੂਠੀ ਕਰਦਾ ਤਰੋ ਪੁਰਾਣਾ ਵੀ ਕੋਈ ਵਾਂਹ ਭਰ ਉਹ ਜੀ ਉਤਰੋਗਾ ਤੇ ਬਾਹਰਲੀ ਕੋਲ ਮੰਦੀ ਅੰਮ੍ਰਿਤਸਰ ਦੀ ਕੋਲ ਜੱਤ ਕਰਨ ਮੰਡੀ ਹੂ ਮੰਦਾ ਤੇ ਜਿਹੜਾ ਮਾਸ ਆ ਗਿਆ ਹੋਇਆ ਜੀ ਸ਼ਰਾਬ ਦੇ ਵਿੱਚ ਬਾਗਰ ਜੀ ਦੁਨੀਆ ਦੀ ਇਹ ਨਹੀਂ ਵਾਲੀ ਨਾ ਜਿਹੜੀ ਤੁਸੀਂ ਕਰਨ ਮੰਡੀ ਹੂ ਉਹਨੂੰ ਉਹਨੂੰ ਦੇ ਜ਼ਿਆਦਾ ਲੱਗਦੀ। ਨਹੀਂ ਲੱਗਦੇ। ਕੋਈ ਗੱਲ ਉਹਦੇ ਵਿੱਚ ਆ ਜਿਹੜੇ ਗੱਲ ਨੇ। ਗੁਰੂ ਬ੍ਰਾਂਗੂ ਦੇ ਬ੍ਰਾਂਗੂ ਦੇ ਕਿਤੇ ਰਹਿ ਕੇ ਇਹ ਸੈਂਟਰ ਦੀ ਗੱਲ ਤਾਂ ਹੈ ਹੀ ਨਹੀਂ ਕੋਈ ਉੱਥੇ ਟੌਪ ਦੀ ਗੱਲ ਹੈ ਬਾਰਾਂ ਦੀ ਕਿਛ ਦੀ ਲੱਗ ਜਾਂਦੇ ਇਹਦਾ ਵਿਸ਼ਾ ਉਹ ਜਿਹੜਾ ਬਾਗ ਦੇ ਪੇੜ ਲੱਗਦੇ ਨੇ ਆ ਬਲਲੇ ਉਹਨਾਂ ਦਾ ਲੱਗਦੀ ਏ ਇਹ ਇਲਾਕੇ ਸਾਰੇ ਘਰ ਜਾਣ ਫਿਰ ਉਹ ਉਥੇ ਜਿਹੜਾ ਨੇ ਅਪੂਚਿਆ ਪਛਾ ਜਲਦੀਆਂ ਨਾ ਉਹਨਾਂ ਦਾ ਵਧੀਆ ਚੱਲਦਾ ਹੈ ਇਹਦੇ ਨਾਲ ਐਸੀਆਂ ਗੱਲਾਂ ਨਾ ਕੁੱਝ ਜਲਦੀ ਜਾਂਦਾ ਇਹ ਜੀ ਉੱਡੇ ਰੁਕੇ ਜੱਲਾ ਕੀ ਇਹ ਜੀ ਬੱਚਾ ਛੋ ਕੇ ਬਾਦੋਂ ਜਿਓ ਗੱਲ ਲੋਕ ਹੋਇਆ ਇਹ ਗੱਲਾਂ ਥਰਡ ਕਲਾਸ ਦੀਆਂ ਨੇ ਜਿਹੜੀਆਂ ਹਾਂ ਇਹੀ ਵਿਸ਼ੇ ਇਹ ਉਥੇ ਨਹੀਂ ਆਹ ਨਾਨਕ ਅਨ ਤੇਰੀ ਰੱਖਾ ਤੇਰੀ ਰੱਖ ਕਰਦਾ ਆਪਣੇ ਮਨ ਨੂੰ ਕਹਿੰਦਾ ਮਨ ਦੀ ਰੱਖਿਆ ਕਰਦਾ ਉਹ ਮਨ ਨੂੰ ਨਹੀਂ ਰੋਧਿਆ ਨਾਨਕ ਮਨ ਨੂੰ ਬਲ ਸੁਬੋਧਨ ਤੇਰੀ ਰੱਖੇ ਨਾਰਕ ਮੇਰੀ ਦਾਨੀ ਕਦਰ ਰੱਖੇ ਤੇਰੀ ਰੱਖੇ